शलोक ਲੋਕ ਮਹੱਲਾ ਤੀਜਾ ਪਰਥਾਏ ਸਾਖੀ बोल दे, ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੇ ਜਿਹੜੀਆਂ ਸਾਖੀਆਂ ਗੁਰਬਾਣੀ ਚ ਆਈਆਂ ਨੇ ਉਹ ਬੰਦਾ ਚਾਹੇ ਇੰਡੀਆ ਦਾ ਹੈ ਚਾਹੇ ਅਮਰੀਕਾ ਦਾ ਹੈ ਚਾਹੇ ਕਿਤੇ ਦਾ ਹੈ ਆ ਰਾਂਗ ਦੀ ਗੱਲ ਕੀਤੀ ਕਿਤੇ ਕ੍ਰਿਸ਼ਨ ਨੇ ਕੀਟ ਕੋਟੇ ਬਣਾਏ ਸਾਰੇ ਵੱਡੇ ਲੈਵਲ ਤੇ ਕਿਹਖਣੇ ਆਏ ਨਾਲ ਕਾਲਾ ਬਸ ਇਹ ਪਰਥਾਏ ਸਾਖੀਆਂ ਬੋਲੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਚੱਕ ਕੇ ਜ਼ੋਰ ਦਿੱਤਾ ਉਹਦੇ ਨਾਲ ਰਵੇਲ ਬਾਪਾ ਉਹ ਤਾਂ ਨਾ ਬੋਲਦੇ ਹੀ ਨਹੀਂ ਉੱਤੇ ਉਹ ਕਹਿੰਦੇ ਪੰਡਤ ਮੁੱਲਾਂ ਜੋ ਲਿਖਦੀ ਆ ਛੱਡ ਚਲੇ ਜਾਂ ਕਿਥੇ ਉਹਨਾਂ ਦੀ ਆ ਉਹ ਕਵੀਨ ਨਹੀਂ ਅਸੀਂ ਵਿੱਚ ਅਸੀਂ ਭੁਲਾਤੇ ਦੀ ਵੀ ਆਦੇ ਦੀ ਰੱਖੇ ਵੱਡ ਉਹ ਹੀ ਕੁਝ ਕਰ ਦੱਤਾ ਨਹੀਂ ਜੀ ਜੀ ਡਰ ਸੀ ਜਿਹੜੇ ਕੰਮ ਦਾ ਉਹ ਹੋ ਗਿਆ ਉਹਨਾਂ ਨੇ ਤਾਂ ਇਹ ਗੱਲਾਂ ਚੇਤਨ ਵਾਸਤੇ ਕਹੀਆਂ ਸੀ ਅਸੀਂ ਇਹਨਾਂ ਰੂਪ ਵਿੱਚ ਕਹਾਣੀਆਂ ਹੀ ਸਮਝ ਲਿਆ ਹਾਂ ਜੀ ਪਾਪੀ ਜਗ ਜਾਣੇ ਉਹ ਜਿਹੜਾ ਸਾਡੇ ਗੁਰਬਾਣੀ ਤੇ ਆਜਾ ਤਾਂ ਦੁਆ ਤੇ ਕੋਈ ਵੀ ਸਾਰੇ ਨਹੀਂ ਬੰਦੇ ਉਹ ਇਹ ਇਸ਼ਾਰੇ ਦੇ ਸਾਡੀ ਸ਼ਗਲ ਹੈ ਇਹ ਕੀ ਦੇ ਜੀ ਇਹ ਭਗਤਾਂ ਦੇ ਪ੍ਰਥਾਏ ਆਇਆ ਅੱਛਾ ਭਲਾਏ ਬੋਲ ਲੈਨੇ ਨਾ ਕਿ ਭਲਾਏ ਬੋਲ ਲੈਨੇ ਉਹ ਵਹਾਂਪੁਰ ਕਹਿੰਦੇ ਸਾਰੇ ਭਲਾਏ ਬੋਲ ਲੈਨੇ ਚਾਹੇ ਕਹਲੋ ਚਾਹੇ ਲੋ ਕਹਨ ਉਹ ਤਾਂ ਇੱਕੋ ਹੀ ਗੱਲ ਹੋ ਗੁਰਮੁਖੀ ਹੋਏ ਸੋ ਆਪਣਾ ਆਪ ਪਛਾਣਨਾ ਸੀਗਾ ਗੁਰਮੁਖੀ ਹੁੰਦਾ ਤਾਂ ਉਹਦੇ ਨੂੰ ਕਰਦਾ ਆਪਣਾ ਆਪ ਪਛਾਣਨ ਦਾ ਤੇ ਅਸੀਂ ਤਾਂ ਚੱਕ ਕੇ ਪਾਸੇ ਜੋੜ ਕੇ ਰੱਖ ਦਿੱਤੀਓ ਸਾਖੀਆਂ ਆਪਣਾ ਪਛਾਣ ਨਹੀਂ ਹੈ ਇਹਨਾਂ ਸਾਖੀਆਂ ਦਾ ਮਹਾਂਕਿਆਂ ਆਪਣਾ ਪਛਾਣ ਵਾਸਤੇ ਥੀਓ ਸਾਰੀ ਗੁਰਮਤਿ ਰੇ ਨਾ ਕਿਨੋ ਆਪਣਾ ਪਛਾਣੇ ਬਲ ਮੁਖਾਂ ਦੇ ਨਹੀਂ ਪਛਾਣੇ ਬਸ ਗੁਰ ਪ੍ਰਸਾਦੀ ਜੀਵਤ ਮਨ ਹੀ ਤੇ ਆ ਗਿਆਨ ਦੀ ਕਿਰਪਾ ਹੋ ਜਾਏ ਗਿਆਨੂ ਨੂੰ ਗਲਜਵੇ ਜੋਦਾਈ ਫਰਜਵੇ ਜੋਦਾ ਮਰਜਵੇ ਆਪਣਾ ਮੁਰਕੇ ਪੰਡ ਚੱਲ ਪਵੇ ਆਪਣਾ ਪੰਡ ਤਿਆਗ ਦਵੇ ਜੀਵਤ ਮਰੇ ਦਾ ਮਤਲਬ ਇਹੀ ਹੈ ਜੀਵਤ ਮਰੇ ਹਾਂਜੀ ਅਸਲੀ ਹਿੱਤੇ ਬੁਲ ਮੰਨੈ ਦਾ ਅਬਦੁੱਲਾ ਬਣਾ ਉਹਦੇ ਨੂੰ ਅੱਲਾਹ ਬੋਲ ਬੋਲ ਜਾਂਦੇ ਇੱਕੋ ਨੇ ਦੋਏ ਮਨ ਹੀ ਤੇ ਮਨ ਮੰਨੇ ਵੀ ਇੱਕ ਮਨ ਨੂੰ ਤਾਂ ਅਸੀਂ ਨਾਨਕ ਸੇ ਕਿਆ ਕਥੈ ਗਿਆਨ ਜਿਹਨਾਂ ਨੂੰ ਬੋਲ ਤੇ ਭਰੋਸਾ ਨਹੀਂ ਆਪਣੀ ਆਤਮਾ ਦੇ ਭਰੋਸਾ ਹੀ ਹੈ ਉਹਨਾਂ ਨੇ ਕੀ ਗਿਆਨ ਕਥਨ ਕਰਨ ਕਹਿੰਦੇ ਗਿਆਨ ਹੁੰਦਾ ਹੁੰਦਾ ਉਹ ਤਾਂ ਤਾਂ ਹੁੰਦਾ ਗਿਆਨ ਹੁੰਦਾ ਨਾਮ ਗੁਰੂ ਦੇ ਰੋਪ ਕਹਿੰਦੇ ਤਾਂ ਉਹ ਗਿਆਨ ਹੁੰਦਾ ਉਹਦਾ ਕਿਆ ਨੇ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁੱਖ ਪਹੂਤਾ ਆਏ ਅੰਦਰੋਂ ਬਾਹਰੋਂ ਹੰਦਿਆ ਸੁద్ధి ਨਾ ਕਾਈ ਪਾਈ ਗੁਰਮੁਖਾਂ ਨੇ ਲਾਈ ਦੇ ਜੇ ਐ ਲਾਇਆ ਜੀ ਨਾ ਚਿਤ ਅੰਤ ਕਾਲ ਔਖਾ ਹੋਈਗਾ ਅਛਾ ਜੀ ਅੰਤ ਦੁੱਖ ਪਹੁੰਚਤਾ ਏ। ਤੋ ਕੋਦਾਂ ਪਹੁੰਚਿਆ ਆ ਜੇ ਉਹ ਦੁੱਖ ਤੋਂ ਫਿਰ ਨਾ ਛੁਕਾਰਾਂ ਦੀ ਹੋ ਨਾ ਕਾਈ ਪਾਏ। ਅੰਦਰੋਂ ਬਾਹਰੋਂ ਅੰਦੇ ਬਾਹਰੋਂ ਅੰਦਰੋਂ ਅੰਦੇ ਹੋ। ਸੋ ਫਿਰ ਉਹਨਾਂ ਨੂੰ ਕੋਈ ਨਹੀਂ ਪਤਾ ਹੁੰਦਾ ਹੁਣ ਕੀ ਹੋਊਗਾ ਕਿੱਥੇ ਜਾਵਾਂਗੇ ਕੀ ਕਰਾਂਗੇ। ਪਾਣੀ ਚੱਲਦਾ ਹੈ। ਉਹ ਪਹਿਲਾਂ ਵੀ ਪਾਣੀ ਚੱਲਦਾ ਉਹ ਫਿਰ ਵੀ ਪਾਣੀ ਚੱਲਣ ਬਾਅਦ ਹੁੰਦਾ ਪੰਡਤ ਤਿੰਨ ਕੀ ਬਰਕਤ ਸਭ ਜੋ ਰੱਤੇ ਹਰ ਨਾਹੀਂ ਜਿਹੜੇ ਦੋਵਤਾਰਾਂ ਕੇ ਜੁਰੂਰ ਚੱਲ ਜਾਂਦਾ ਉਹਨਾਂ ਦੀ ਬਰਕਤ ਉਹਨਾਂ ਦੀ ਕਮਾਈ ਸਾਰਾ ਸੰਸਾਰ ਖਾਂਦਾ ਜਿਵੇਂ ਗੁਰਬਾਣੀ ਲਿਖੀ ਗਈ ਹੈ ਭਗਤਾਂ ਨੇ ਲਿਖੀ ਗੁਰੂਆਂ ਨੇ ਲਿਖੀ ਹੈ ਕਵੀ ਨੇ ਲਿਖੀ ਹੈ ਸਾਰਿਆਂ ਨੇ ਇਹ ਬਰਕਤ ਹੈ ਸਾਰਾ ਸੰਸਾਰੇ ਖਾਂਦਾ ਪੰਡਤ ਤਿੰਨ ਕੀ ਬਰਕਤ ਸਭ ਜਗਤ ਖਾਏ ਪੰਡਤ ਨੂੰ ਕਿਹਾ ਪੰਡਤ ਨੂੰ ਸੰਬੋਧਨ ਕੀਤਾ ਗਿਆਨ ਦਾ ਰੰਗ ਚੜ ਗਿਆ ਪੰਡਤ ਪਹਿਲਾਂ ਦੇ ਖਲਾਫ ਰਹਿੰਦੇ ਜਿਨ ਗੁਰ ਕੈ ਸ਼ਬਦ ਸੁਲਾਇਆ ਹਰਿ ਰਹੇ ਸਮਾਇ ਗੁਰ ਉਪਦੇਸ਼ ਲਾ ਕੇ ਜਿਨ੍ਹਾਂ ਨੇ ਉਸ ਸਾਰੇ ਕੀਤੀ ਹੈ ਆਪਣੇ ਵਰਗੇ ਨਾਲ ਸਬਸਲਾ ਦੀ ਕੀਤੀ ਹਰਸਿਓ ਰਹੇ ਸਮੇਸਸ ਉਹ ਹਰਵੇ ਨਾਲ ਜੁੜੇ ਰਹੇ ਸਮਾਇ ਰਹੇ ਪੰਡਤ ਦੂਜੇ ਭਾਏ ਬਰਕਤ ਨਾ ਹੋਵੇਈ ਮਾਇਆ ਦੀ ਭੁੱਖੇ ਚ ਬਰਕਤ ਨਹੀਂ ਹੁੰਦੀ ਇਹ ਦੂਜੇ ਭਾਏ ਆ ਮਾਇਆ ਦੀ ਭੁੱਖ ਦੂਜੀ ਮਾਇਆ ਨਾ ਨਾ ਹੁੰਦਾ ਇਹ ਸੰਸਾਰੀ ਤਾਂ ਰੂਪ ਹੋਇਆ ਠੀਕ ਹੈ ਜੀ ਪੰਡਰ ਦੂਜੇ ਪਾਏ ਬਰਕਤ ਨਾ ਹੋਵੇਈ ਨਾ ਧਨ ਪੱਲੇ ਪਾਏ ਆਹ ਇਕੱਠਾ ਕੀ ਹੁਣ ਬਰਕਤ ਅੰਦਰ ਵੀ ਦਾ ਕੁਝ ਨਹੀਂ ਇਕੱਠਾ ਹੋਇਆ ਹੋ ਗਿਆ ਨੁਕਸਾਨ ਹੋ ਗਿਆ ਉਹ ਤਾਂ ਉਗਣ ਥੱਕ ਸੰਤੋਖ ਨਾ ਆਇਓ ਜਲਤ ਵੀ ਸੰਤੋਖ ਆਉਂਦੀ ਚਲਣਾ ਜਿਹੜੀ ਹੈਗੀ ਆ ਕ੍ਰਿਸ਼ਨਾਂ ਦੀ ਆਗੇ ਤਨ ਦਾ ਜਲ ਜਰੂਰ ਨਿਕਲ ਜਾਂਦੀ ਹੈ ਤੇ ਇੱਥੇ ਵੀ ਸੰਤੋਖ ਪਰ ਲਿਖੀ ਹੈ ਗੱਲ ਕੀ ਦਾ ਕੇ ਜੀ ਤਾਂ ਹੀ ਗੱਲ ਦੀ ਹੋਈ ਹੈ ਨਾਮ ਤਾਂ ਇਥੋਂ ਮਣ ਲੈਣੇ ਪਹਿਲਾਂ ਸੰਤੋਖ ਤਾਂ ਆਵੇ ਕਾਬਲਤਾ ਹੋਵੇ ਲੈਣ ਦੇ ਨਾਮ ਨੂੰ ਲੈਣ ਦੇ ਜਾਂ ਕਾਬਲੇ ਨਹੀਂ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਕੂਕ ਪੁਕਾਰਿਆ ਜਿਹੜਾ ਮਨ ਕਲਪਦਾ ਨਾ ਮਾਇਆ ਵਾਸਤੇ ਇਹ ਕੂਕ ਪੁਕਾਰ ਹੈ ਇਹ ਨਹੀਂ ਹਟਣੀ ਜੇ ਤੱਕ ਨਹੀਂ ਆਇਆ ਇਹ ਇਹ ਖਤਮ ਨਹੀਂ ਹੋਣੀ ਕੂਕ ਪੁਕਾਰ ਮਾਇਆ ਦੀ ਭੁੱਖ ਕਿਉਂਕਿ ਜਿਹੜਾ ਹੈਗਾ ਚਿੰਤਾ ਜਿਹੜੀ ਹੈਗੀ ਕੋਈ ਇਲਾਜ ਨਹੀਂ ਹੈਗਾ ਪੂਰੀ ਖਤਮ ਹੋ ਸਕਦੀ ਨਾਨਕ ਨਾਮ ਵੀ ਮੂੰਹ ਕਾਲਾ ਉੱਠ ਜਾਏ ਨਾ ਨਾ ਗਾਣਾ ਸਖਣੇ ਰਹਿ ਜਾਂਦੇ ਨੇ ਮੂੰਹ ਕਾਲੇ ਰਹਿੰਦੇ ਰਿਆਂਦੇ ਉੱਠ ਕੇ ਚਲੇ ਜਾਂਦੇ ਨੇ ਬੱਸ ਇੱਕ ਗੱਲ ਕਹਿ ਦਿੱਤੀ ਤੇਰੀ ਫਿਕਰ ਹੈ ਸਰਬਜੀਦੂ ਨੀਂਦ ਉੱਡ ਜਾਣੀ ਚਾਹੀਦੀ ਥੋੜੀ ਹਰ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੈ ਮਿੱਤ ਹੋਂ ਬਲ ਜਾਇ ਤੇਰੇ ਪਿਆਰੇ ਹਰ ਸੱਜਣ ਮੈਨੂੰ ਬੁਲਾ ਦੇ ਜਿਸ ਨੂੰ ਬਿਲਕੁਲ ਮੈਨੂੰ ਪਛਤਾ ਪਤਾ ਲੱਗ ਜਵੇ ਰਸਤਾ ਦੇਖ ਜਿਵੇਂ ਮਦੂਕ ਕਿਹੜੇ ਰਾਹ ਜਾਣ ਸਮਝ ਆ ਜਵੇ ਰਸਤੇ ਦੀ ਐਸਾ ਕੋਈ ਗੁਰੂਖ ਮੈਨੂੰ ਆ ਸੱਜਣ ਜੇਰਾ ਮੈਨੂੰ ਸਮਝ ਆ ਜਵੇ ਗੁਰਬਾਣੀ ਕੀ ਕਹਿੰਦੀ ਹੈ ਜੋ ਹਰ ਦਸਤੇ ਮਿਤ ਤਿਸ ਜਾਈ ਜਿਹੜਾ ਮੇਤਾ ਹਰ ਦੀ ਗੱਲ ਕਰੇ ਔਰ ਕੋਈ ਗੱਲ ਹੀ ਨਾ ਕਰੇ ਉਹਦੇ ਤੇ ਤਾਂ ਮੈਂ ਕੁਰਬਾਨ ਜਾਂਦਾ ਹਰੇ ਦੱਸੇ ਹਰ ਕੀ ਹੁੰਦਾ ਹੋਰ ਕੁਝ ਨਾ ਦੱਸੇ ਹੋਰੀ ਦੀ ਗੱਲ ਕਰੇ ਕਰਦਾ ਤਿੰਨ ਸਿਉ ਕਰੀ ਹਰ ਨਾਮ ਧਿਆਈ ਤੇ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਉਹਦੇ ਨਾਲ ਗੁਣ ਸਾਂ ਦੀ ਸਾਂਝ ਪਾਉਣੀ ਚਾਹੀਦੀ ਹੈ ਹੁਣ ਹਾਜੇ ਕਰ ਲਈ ਚਾਹੀਦੇ ਨੇ ਆਲ ਦੇ ਵੀ ਧਿਆਨ ਰੱਖਣਾ ਚਾਹੀਦਾ ਇਸ ਤਰ੍ਹਾਂ ਆਪਾਂ ਅਰਦਾਸ ਤੋਂ ਬਾਅਦ ਵੀ ਕਹਿੰਦੇ ਨੇ ਸਹੀ ਪਿਆਰੇ ਮਿਲ ਜੇਨਾ ਮਿਲਿਆਂ ਤੇਰਾ ਨਾਮ ਸੇਵ ਹਰ ਸੁਖ ਪਾਈ ਹਰ ਪਿਆਰਾ ਹੀ ਚਾਹੀਦਾ ਹੈ ਚ ਸੁਖ ਹੈ ਸੁਖ ਦੀ ਪ੍ਰਾਪਤੀ ਹੈ ਜੇ ਸੁਖ ਦੀ ਪ੍ਰਾਪਤੀ ਕਰ ਹੈ ਤਾਂ ਗੁਰ ਕੀ ਸੇਵਾ ਕਰੋ ਹਰ ਕੀ ਸੇਵਾ ਕਰ ਸੇਵਾ ਕੀ ਪਾਣੀ ਚੱਲਣਾ ਹਰ ਕੀ ਸੇਵਾ ਬਲਹਾਰੀ ਸਤਗੁਰ ਤੇਸ ਜਿਨ ਸੋਝੀ ਪਾਈ ਮੈਂ ਉਹਦਾ ਨੇ ਸੋਝੀ ਪਾਈ ਠੀਕ ਹੈ ਜਿਨੇ ਹਰ ਸੇਵਾ ਕਰਨ ਦੀ ਸੋਝੀ ਪਾਈ ਹੈ ਗੁਰੂ ਜੇ ਬਾਤ ਬੋਲ ਠੀਕ ਹੈ ਤੇ ਸਾਡੇ ਵਾਸਤੇ ਇਹ ਗੁਰਬਾਣੀ ਵਾਲਾ ਹੈ